ਟੰਡੋ ਲਤ ਝੁੰਡਤ ਹੋਂ ਫਿਰੀ ਟਹਿ ਟਹਿ ਪਵਨ ਕਰਾਰ ਭਾਰੇ ਟਹਿਤੇ ਢੇ ਪਈ ਹੋਲੇ ਨਿਕਸੇ ਪਾਰ ਹਾਂ ਟੰਡੋ ਲਤ ਝੁੰਡਤ ਹੋਂ ਫਿਰੀ ਹਾਂਜੀ ਮੈਂ ਲੱਭਤੀ ਫਿਰੀ ਹੂੰ ਹੂੰ ਝੁਗੜਦੀ ਫਿਰੀ ਟਹਿ ਪਵਨ ਕਰਾਰ ਹੌਸਲਾ ਜਿਹੜਾ ਸੀ ਟੰਦਾ ਜਾਂਦਾ ਰਿਹਾ ਮੇਰਾ ਬਿਨਬੂ ਖੁਲੀ ਬਿਨਬੂ ਵਿਲੂ ਕਨੇ ਵਿਲੂ ਤੋਂ ਜਿੱਤੀ ਚ ਰਹੀ ਕਦੇ ਹੌਸਲਾ ਟਹਿ ਜਾਂਦਾ ਸੀ ਕਦੇ ਭੱਜ ਜਾਂਦਾ ਸੀ ਕਦੇ ਟੰਦਾ ਸੀ ਜਾਂਦਾ ਸੀ ਐਂ ਤਾਂ ਫਿਰ ਕਹਿੜਾ ਕਰ ਬਿਨਈ ਲੱਭੂ ਯਰੂਰ ਐਂਦੇ ਵਾਲੇ ਸੀ ਉਹ ਟਹਿ ਗਏ ਜਿਹੜੇ ਝੂਟੇ ਸੀ ਉਹ ਟਹਿ ਗਏ ਜਿਹੜੇ ਹੌਸਲਾ ਛੱਡ ਗਏ ਉਹ ਟਹਿ ਗਏ ਹੋਰ ਹਲਕੇ ਰਹਿ ਨੇ ਜਿਹੜੇ ਤਾਂ ਛੁੱਟ ਗਏ ਆਤਮਾ ਜਿਹਨਾਂ ਨੇ ਸਰੀਰ ਦੀ ਵਿਰੋਧ ਵੀ ਛੱਡੀ ਹੋ ਗਏ ਹਾਂ ਟਹਿ ਪਏ ਹੋਲ ਇਹਨਿਕ ਪਾਰ ਉਹ ਦੇ ਨਾਲ ਉਹਦੇ ਉਹ ਪਰਮ ਪੈਦਾ ਭਾਰ ਰਹਿ ਗਿਆ ਜਿਹਨੂੰ ਪਹੁੰਚੇ ਉਹ ਪਰਮ ਪੈਦਾ ਭਾਰ ਰਹਿ ਗਿਆ ਸਰੀਰ ਨਾਲ ਜੁੜੇ हरुए ਹਾਂ ਹਾਂ ਉਹ ਟਹਿ ਗਏ ਠੀਕ ਹੈ ਅਮਰ ਅਜਾਤੀ ਹਰ ਮਿਲੇ ਤਿੰਨ ਕੇ ਹੌਂ ਬਲ ਜਾਉ ਤਿੰਨ ਕੀ ਢੂੜ ਅਘੂਲੀ ਐ ਸੰਗਤ ਮੇਲ ਮਿਲਾਉ ਅੰਮਰ ਅਜਾਤੀ ਨਾਲ ਬਿਨ ਅਜਾਤੀ ਦੇ ਬਿਨ ਬੁਗਿਆ ਸਭ ਕੁਝ ਦੇਰਦਾ ਅੱਛਾ ਅਜਾਤੀ ਹਲ ਮਿਲੈ ਜਦ ਕੁਝ ਵੀ ਨਹੀਂ ਮਿਲਦੀ ਪਰ ਅਮਰ ਅਜਾਤੀ ਫਤ ਮਿਲਦਾ ਅੱਛਾ ਜੀ ਜਿਹਦੇ ਹੱਬੇ ਉਹ ਫਿਰ ਅਗਰਾ ਬੁੱਧੀ ਉਗਰਾ ਪਰ ਦਿੱਤੀ ਪੁਰਦੀ ਫਤ ਮਿਲ ਜਾਂਦੀ ਹੈ ਹਮ ਹਲ ਵਿਰਾਕਾਰੀ ਦੁਧਿਆਦੀ ਬਦੂਈ ਹੈ ਅੱਛਾ ਜੀ ਹਾਂ ਕਹਿੰਦਾ ਮੈਂ ਕਹਿੰਦਾ ਹਰ ਮਿਲ ਜੀਦਾ ਅਮਰ ਅਜਾਤੀ ਪਦ ਮਿਲਦਾ ਉਹ ਇਕੱਠਾ ਹੀ ਹੈ ਕੋਈ ਵੱਲ ਅੱਛਾ ਜੀ ਗੁਰੂ ਬਣ ਜਾਂਦਾ ਅਮਰ ਅਜਾਤੀ ਬਣ ਜਾਂਦਾ ਜਦੋਂ ਉਹ ਰਾਜਾ ਦੀ ਪੱਤ ਮਰ ਜਾਂਦਾ ਤਦ ਕੇ ਕੁਰਬਾਨ ਹੋਉ। ਇਹਲੇ ਉਸ ਅਵਸਥਾ ਨੂੰ ਪਹੁੰਚਣ ਲਈ ਉਹਨੇ ਕੁਰਬਾਨ ਪਾਈਏ। ਇਹ ਗੀਤ। ਥਨ ਕੀ ਟੁੜ ਅਕੂਲੀ ਹੈ ਸੰਗਤ ਮੇਲ ਮਿਲਾਓ। ਹੈ। ਉਹ ਸਾਡੀ ਜਣੇ ਗੱਲ ਦੀ ਹੈ ਨਾ ਗਿਆਨ ਅਕੂਲੀ ਹੈ ਉਹ ਦੂਏ ਦੇ ਕੀਤਾ ਜਾ ਸਕਦਾ ਉਹ ਦੂਆ ਗਿਆਨ ਦੇ ਵਿੱਚ ਉਹ ਕੋਲਦਾ ਨਹੀਂ ਹੈ ਕਿ ਜੇ ਹੋਰ ਚੀਜ਼ ਦਿਸ ਆਪਣੀ ਉੱਤੋਂ ਆ ਰੰਗ ਦਾ ਇੱਕ ਕੋਲ ਤੁਸੀਂ ਝੂਠ ਚ ਬਲੰਕ ਨਹੀਂ ਕਰ ਸਕਦੇ ਬਸ ਕੀਤਾ ਹੋਇਆ ਹੀ ਬੋਲਿਆ ਜਾ ਸਕਦਾ ਫੜਿਆ ਜਾਂਦਾ ਕੋੜ ਬੁਧੀਏ ਸੱਚ ਪਿਓਰੇ ਬੋਲ ਹੁੰਦਾ ਨਹੀਂ ਤਾਂ ਸੱਚ ਪੜਿਆ ਜਾਂਦਾ ਹੈ। ਮਤੋਂ ਬੀ ਤੁਸੀਂ ਇਹਦੇ ਵਿੱਚ ਝੂਠ ਦਾ ਕੋੜ ਲਾਦੂਗਾ ਜਦ ਇਹ ਪੜਿਆ ਜਾਂਦਾ। ਠੀਕ ਹੈ ਜੀ। ਹਾਂ ਤੇਰੀ ਥੋੜਾ ਖੋਲੀ ਹੈ। ਸੰਗਤੀ ਮੇਲ ਮਿਲਾਓ। ਸੱਦ ਮੇਲ ਮਿਲਾਓ ਸੰਗਤ ਦੇ ਵਿੱਚ। ਲੋ ਕਕਰ ਮਿੱਧਾ ਮੇਲ ਮਨਾਉਂਦਾ ਸੰਗਤ ਦਾ ਇਹੀ ਸੰਗਤ ਆਪਸ ਵਿੱਚ ਕੀਦੀ ਮੇਲ ਮਨਾਉਂਦਾ ਸੰਗਤ ਇੱਥੇ ਮਨਚਕ ਵੀ ਐ ਜੀ ਦੂਰ ਕਿਤੇ ਸੰਗਤ ਵੀ ਐ ਵੀ ਐ ਗੁਰੂ ਜੀ ਜਿਹੜੀ ਸੰਗਤ ਸੀ ਇਹ ਗਿਆਨੀ ਸੀ ਪੁੱਤਾਂ ਕਰਦਾ ਸੰਤ ਨੂੰ ਨਤੋ ਗਿਆਨ ਚ ਜਾਂਦਾ ਉਹ ਦੂਜੇ ਥੱਲੇ ਜਾਂਦਾ ਨਾ ਇਹ ਦੂਏ ਨਾਲ ਕੋਈ ਇਕੱਠਾ ਰਹਿੰਦਾ ਠੀਕ ਹੈ ਸੰਤਤ ਦੇ ਵਿੱਚ ਬੁਲਾਉਣ ਵਾਲਾ ਸੰਤਤ ਦੇ ਵਿੱਚ ਪ੍ਰੇਮ ਪੈ ਜਾ ਕਰਨ ਵਾਲੀ ਹੈ ਇਹ ਗਿਆਨ ਇਹ ਗਿਆਨ ਇਹ ਗੁਰਮਤਿ ਦਾ ਗਿਆਨ ਸੰਤਤ ਦੇ ਵਿੱਚ ਇੱਕ ਪੈ ਜਾ ਕਰਨ ਵਾਲਾ ਇੱਕ ਬਣਾਉਣ ਵਾਲਾ ਉਹਨੇ ਇੱਕ ਤਾਂ ਕਿਉਂਦੀ ਹੈ ਗਿਆਨਿਆਂ ਦੀ ਹੈ ਉਨੇ ਦੇ ਵਿੱਚ ਹੋਰ ਕੁਝ ਮਲਾਤਾ ਆ ਪਤਾ ਲੱਗਦਾ ਹੋਏ ਦਾ ਭਾਈ ਗੁਰਦਾਸ ਜੀਆਂ ਪਤਾ ਲੱਗਿਆ ਉਹ ਜੋ ਕੁਝ ਵੀ ਬਣਾਉਂਦੇ ਨੇ ਜੱਟ ਪਤਾ ਲੱਗ ਜਾਂਦਾ ਮਲਾਇ ਹੋਏ ਦਾ ਮੱਛਾ ਕੋ ਲਿਖੇ ਇਹ ਕਰਕੇ ਸੰਪਰਦਾਇ ਬੰਗੇ ਇਹਦੇ ਜੋ ਹੋਰ ਕੋ ਜਿਹੜਾ ਕੁਝ ਕਹੋ ਲਿੰਦਾ ਤਾਰੇ ਪਾਪੜ ਘੋਲਤਾ ਉਹਨਾਂ ਦੀ ਤੁਸ ਜੀ ਤਾਂ ਦੇ ਬੜੀ ਕੀ ਜੇ ਜੇ ਟੱਕਾ ਤੋਂ ਲਾ ਗੋਲਦੀ ਉਹ ਜਾਨ ਤੋਰ ਬਣ ਗਈ ਇਹਦੇ ਜੇ ਜੇ ਪ्योर ਰਹੇ ਗੁੱਛ ਬਦੀ ਸਕਦਾ ਖੁੱਲੀ ਹੈ ਮਨ ਦੀਆ ਗੁਰ ਆਪਣਾ ਪਾਇਆ ਨਿਰਮਲ ਨਾਉ ਜਿਨੇ ਨਾਮ ਦੀ ਆ ਤਿਸ ਸੇਵਸਾ ਤਿਸ ਬਲਹਾਰਾ ਜਾਉ ਹਰਦੀਆ ਕੋ ਪ੍ਰਣ ਲੋਟਾ ਆਪਣੇ ਸਾਥ ਨੂੰ ਦੇਤਾ ਆਪਣੇ ਆਪਣੇ ਪ੍ਰਵੇਗ ਦੇਤਾ ਪਾਇਆ ਨਿਰਮਨ ਨੂੰ ਪ੍ਰਾਪਤੀ ਹੋਈਆ ਨਿਰਮਨ ਨੂੰ ਦੀ ਪ੍ਰਾਪਤੀ ਹੈ ਨਿਰਮਨ ਨਾਮ ਲੈ ਲਿਆ ਸੇਤਾ ਅਸਬੇਤ ਕੇ ਸਤੂਰ ਕੇ ਪਾਸ ਤੇ ਸੇਵਕੇ ਨਾਲ ਜਰਾ ਇਹ ਤੇ ਤਾਂ ਨਾ ਮਿਲ ਜਾਂਦਾ ਹੈ ਠੀਕ ਹੈ ਜੀ ਜਿਨ ਨਾਮ ਦੀਆ ਤੇ ਸੇਵਸਾ ਜਿਹਦੇ ਨਾਮ ਦਿੱਤਾ ਹੈ ਸਤਗੁਰ ਨੇ ਉਸੇ ਦੀ ਸੇਵਾ ਕਰਦਾ ਇਸ ਬਲਹਾਰੇ ਜਾਉ ਇਸ जो ਸਾਰੇ ਸੋ ਢਾਸੀ ਇਸ ਵਿੱਚ ਅਵਰ ਨ ਕੋਏ ਗੁਰ ਪ੍ਰਸਾਦੀ ਤਿਸ ਸੰਮਲਾ ਤਾਂ ਤਨ ਦੁਖ ਨ ਹੋਏ ਜਿਸ ਉਸਾਰੇ ਜੀਵਨ ਉਸਾਰੇ ਸਦੀਰ ਐਡਾ ਵੱਡਾ ਕੀਤਾ ਜਿਹਦੇ ਬੁੱਧੀ ਐਡੀ ਵੱਡੀ ਕੀਤੀ ਹੈ ਜੀ ਉਹ ਐਡਾ ਵੱਡਾ ਕੀਤਾ ਹੋਈਟ ਆ ਵੀ ਉਹ ਚੱਗ ਲੈ ਇਹ ਬੜਵਾ ਸਕਦਾ ਹੈ ਬਗਵਾੜ ਵੀ ਸਕਦਾ ਹੈ ਟਾਂਸ ਸਕਦਾ ਹੈ ਹੂੰ ਹੂੰ ਉਹ ਕੋਈ ਨਾ ਕੋਈ ਇਹਨੂੰ ਢਾ ਸਕਦਾ ਨਾ ਕੋਈ ਉਸਾਰ ਸਕਦਾ ਨਾ ਕੋਈ ਇਹਨੂੰ ਵਰ ਦੇ ਸਕਦਾ ਨਾ ਕੋਈ ਇਹਨੂੰ ਤਰਾਫ ਦੇ ਸਕਦਾ ਅੱਛਾ ਤੁਸੀਂ ਇਹ ਜੀ ਹੋ ਕੋਈ ਦੀ ਹੈ ਨਾ ਤੂੰ ਖੁੱਲ ਜਾਈਗੀ ਇਹ ਕਰ ਜਾਈਗੀ ਉਹ ਕਰ ਜਾਈਆ ਤથા ਸਭ ਘਟ ਕੇ ਪਰੇ ਮਾਰੀਓ ਹੋਈਆਂ ਜੀਆਂ ਕਥਾਵਾਂ ਬਣਾਈਆਂ ਹੋਈਆਂ ਬੜੇ ਬੜੇ ਜੇ ਇੱਜ਼ਤਾ ਕੋਈ ਬੰਕੀ ਦੇ ਵਿੱਚ ਦੋ ਅੱਲ ਐਸੇ ਲਿਖ ਤੋ ਕੇ ਪਰੇ ਮਾਰੀ ਠੀਕ ਉਠਾਰਿਆ ਹੋਈ ਦਾ ਸਕਦਾ ਹੈ ਠੀਕ ਹੈ ਬ੍ਰਹਮਾ ਵਿਸ਼ਨੂੰ ਮਹੇਸ਼ਾ ਦਾ ਜਿਤ ਕਰਮ ਹੋ ਗਏ ਨੇ ਜਿਆਦਾ ਹੱਥੇ ਨਹੀਂ ਉਪਰਦਾ ਹੁੰਦੇ ਆ ਬਣਾਉਣ ਜਦੋਂ ਤਾਂ ਗਿਆਨ ਦੀ ਕਿਰਪਾ ਨਾਲ ਉਹਦੇ ਜ਼ਬਾਨ ਆਪਣੇ ਆਪ ਨੂੰ ਬਣਾਵ ਉਹੋ ਜਿਹਾ ਬਣਾ ਹੂੰ ਹੂੰ ਉਦਿਸਮਾਨਤਾ ਲਮਾ ਉਹੋ ਜਿਹਾ ਬਣਾ ਉਹਦੇ ਵਰਗਿਓ ਰੂਪ ਆਪਣੀ ਉਹਦੇ ਪੁੱਛਾਈ ਆਪਣਾ ਰੂਪ ਰੰਗ ਬਣਾਵ ਤਨ ਦੁੱਖ ਨਾ ਹੋਵੇ ਫਿਰ ਤਨ ਕੋਈ ਤਕਲੀਫ ਨਹੀਂ ਹੁੰਦਾ ਜਦ ਕਾਰਨ ਕਿਉਂ ਕਰ ਲੈਣੀ ਹੈ ਜਿਆ ਠੀਕ ਹੈ ਜੀ ਆਪਣੀ ਜੇ ਤਬਦੀਲੀ ਲਿਆਉਣੀ ਹੈ ਉਹਦੇ ਦੀ ਤਬਦੀਲੀ ਦੀ ਦੀ ਇੱਛਾ ਦੀ ਕਰਦੀ ਰੱਖਣੀ ਉਹ ਤਬਦੀਲੀ ਲਿਆ ਇਹਦੀ ਇੱਛਾ ਦੀ ਕਰਦੀ ਆਪਣੇ ਜਿਸ ਕਰਦੇ ਠੀਕ ਹੈ ਜੀ ਆਪਣੇ ਆਪ ਨੂੰ ਉਹਦੇ ਪਾਣੀ ਚ ਫਿੱਟ ਕਰਦੇ ਹੁਹ